ਸ਼ਲੋਕ ਮਹੱਲਾ ਪਹਿਲਾ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿੱਖਦਾਰ ਜਿਹਨੇ ਇਹੇ ਸਾਨੂੰ ਪੜ੍ਹਾਏ ਹੋਏ ਜਿੱਦਾਂ ਕਿ ਕਿੱਤੋਂ ਆਇਆ ਕੋਲ ਜਿਹਦੇ ਨਾਲ ਗੱਲ ਕਰ ਰਹੇ ਸੀ ਉਹ ਕਿਸੇ ਚੀਜ਼ ਨੂੰ ਬੋਲਦਾ ਉਹਨੂੰ ਦੱਸਿਆ ਹੋਇਆ ਧਰਮ ਨੇ ਦੱਸਿਆ ਇਹ ਧਰਮ ਨੂੰ ਪੂਰਾ ਉਹ ਜਿਹੜਾ ਜਿਹੜੀ ਉਹਦੀ ਬਣਾਉਤ ਹੈ ਇਹ ਕਹਿੰਦੇ ਕਿ ਜਿੱਦ ਤਾਂ ਹੈਗੇ ਨਹੀਂ ਅਸੀਂ ਨਹੀਂ ਬਤ ਦਿਆਂ ਪਰ ਉਹ ਜਿਹੜਾ ਜਿਹੜਾ ਬੰਦੇ ਤੇ ਰਾਜੇ ਨੇ ਦੱਸਿਆ ਜਿੱਦ ਕਿ ਇਹ ਜੇ ਉੱਧੇ ਨੇ ਦਾਤ ਹਲੋ ਖੋਦਿਛੇ ਤੇ ਦੇ ਹਾਪ ਹੋਰ ਵੱਲੋਂ ਕਰਤੀ ਕੋਈ ਜਿੰਨੇ ਬਣ ਬੱਤਾਂ ਵਾਲੇ ਨਾ ਮੁਖਾ ਸਾਰੀ ਜਿੱਦ ਦੇ ਕਹਿਣ ਦਾ ਮਤਲਬ ਇਹ ਹੈ ਪਰ ਉਹ ਆਪਣੇ ਆਪ ਨੂੰ ਜਿੱਦ ਨਹੀਂ ਬੰਦੇ ਆਪਣੇ ਆਪ ਨੂੰ ਦੇਵਤਾ ਮੰਨਦੇ ਤਾਂ ਉਹਨਾਂ ਨੂੰ ਜ਼ਰੂਰੀ ਸੀ ਕਿ ਤੁਹਾਨੂੰ ਜਿੱਦ ਕੋਈ ਹੋਰ ਫੱਬਰ ਪੂਸਾ ਪਾਉਦੇ ਵੀ ਜਿੱਦ ਕੋਣ ਹੁੰਦਾ ਗੁਰਬਾਣੀ ਫੱਬਰ ਪੂਸਾ ਖਤਮ ਕਰਕੇ ਕਹਿ ਕੇ ਵੀ ਜਿੱਦ ਤਾਂ ਸ਼ੁਰੂ ਹੋ ਗਿਆ ਧਰਮ ਦਾ ਇਹ ਕਾਰਨ ਸੀ ਭਗਤਾਂ ਨੂੰ ਖਾਤਿਆ ਤੇ ਤੇ ਵੱਢ ਕੇ ਸਟਾਉਣ ਦਾ ਜੋ ਵੀ ਤੁਸੀਂ ਇਹ ਦੇ ਵਿੱਚ ਸਰਬਦੀ ਦੇ ਦੇਖਦੇ ਹੋ ਸਾਖੀਆਂ ਦੇ ਵਿੱਚ ਨਾਵ ਦੇਵ ਰਾ ਯਕਵੀਰ ਰਾ ਇਹ ਗੁਰੂ ਘਰ ਹੋਇਆ ਕੁਛ ਨਹੀਂ ਸਾਡੇ ਕੋਲ ਉਧਰ ਤਕਲੀਫ ਹੈ ਬਹੁਤ ਬੜੀ ਇਸ ਗੱਲ ਦੀ ਉਹ ਕਹਿੰਦਾ ਜਿੱਦੇ ਨੇ ਕਿੰਨੀ ਵੱਡੀ ਮਤਲਬ ਬਰਦਾਸ਼ਤ ਨਹੀਂ ਬਹੁਤ ਹੈ ਰਾਜੇ ਉਹਦੇ ਉਸ ਵਕਤ ਉਸ ਧਰਮ ਨੂੰ ਗੱਦੀ ਬੈਠੇ ਠੀਕ ਰਾਜੇ ਸਾਰੇ ਪੂਰਤੀ ਪੂਜਕ ਸੀ ਇਹ ਤਾਂ ਸੁਪਾ ਕੇ ਅਰੇ ਨੇ ਕਾਇਗੋ ਪਾਂਡ ਪੂਜਤਾ ਹੈ ਪਸ਼ੂ ਪਾਂਡ ਮੇਂ ਪਰਮਿਸ਼ਨ ਲੋਜੀ ਤੇ ਫਿਰ ਕਿੰਨੀ ਸੱਟ ਵਈ ਦੀ ਇਹ ਬਾਲੀ ਸੱਟ ਮਾਰਦੀ ਤਾਂ ਬਚ ਨਹੀਂ ਆਈ ਹਾਂਜੀ ਉਹ ਜਿੱਦਾਂ ਦੱਸਦੀ ਪਹਿਲਾਂ ਪਹਿਲੀ ਲਾਈਨ ਤੇ ਵੀ ਜਦ ਇਹ ਹੁੰਦਾ ਇਹ ਤਾਂ ਸਮਝਿਓ ਨੇ ਭਾਈ ਜਿਹੜੇ ਤੋਂ ਸਭ ਰਾਏ ਉਹ ਨਹੀਂ ਹੁੰਦੇ ਇਹ ਖੁਦ ਆਪ ਜਿੱਦ ਦੇ ਜੀਰ ਦੇ ਦੁਇਤਰ ਪਰ ਹੈ ਜਿੰਨੇ ਲੋਕ ਐ ਸਾਰੇ ਜਿੰਨੇ ਹੀ ਐ ਫਿਰ ਤਾਂ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਉਤਾਰ ਕਲੀ ਅੰਦਰ ਕੈਤ ਤਾਂ ਕਲੀ ਦੀ ਸ਼ਰਤ ਜਿਹੜੇ ਕਾਲੀ ਚ ਵਰਤ ਰਹੇ ਆ ਉਹ ਉਹ ਗਿਣ ਨੇ ਹਾਂ ਮਿਲ ਤੇ ਤਾਂ ਕਰ ਜੋ ਫਿਰ ਕਾਲੀ ਕਿਛੜਿਆ ਤਾਂ ਪਾਣੀ ਤੋਂ ਲਹਿਰ ਵਖਰੀ ਦਿਖਾਈ ਦਿੱਤੀ ਹੈ ਕਿ ਕਿਆ ਹੋਇਆ ਪਾਣੀ ਇੱਕ ਛਰ ਕਲੀਰ ਤੇ ਇਹ ਦੇਖ ਹਾਂਜੀ ਜਦੋਂ ਕਲੀਰ ਤੋਂ ਬਾਹਰ ਕਲਪਨਾ ਤੋਂ ਬਾਹਰ ਚਲੇਗਾ ਫਿਰ ਜਿੰਨਾ ਨਹੀਂ ਹਾਂਜੀ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਜਿਹੜੇ ਤੀਹ ਪੁੱਤ ਜਿਹੜੇ ਉਹਦੀ ਬਖਸ਼ੀਦਾ ਆਪਣੇ ਜਿਹੜੇ ਉਹ ਕਹਦੇ ਨੇ ਅਸਲ ਵਿੱਚ ਉਹ ਨੂਰ ਹੈ ਛੇ ਲੱਖ ਦੇ ਜਿਹੜੇ ਤੀਹ ਪੁੱਤ ਨੇ ਉਹਨਾਂ ਦੇ ਉਹ ਨੂਰ ਹੈ ਅਸੀਂ ਵੀ ਉਹਨੂੰ ਮੰਨਦੇ ਤੀਹ ਪੁੱਤ ਨੂਰ ਹੈ ਉਹ ਤਾਂ ਨੂਰ ਕਿਹਜਾ ਤਾਂ ਪੈਦਾ ਨਹੀਂ ਹੋਇਆ ਹੈ ਇੱਕ ਨੂਰ ਹੈ ਇਹਦਾ ਜਨਮ ਨਹੀਂ ਹੋਇਆ ਹੈ ਕਿਤੇ ਲਿਖਿਆ ਹੈ ਹਾਂ ਉਹ ਦੋ ਤਾ ਦਾਲ ਹੋ ਸਕਦੀ ਹੈ ਬਸ ਤੀਹ ਪੁੱਤ ਦੇ ਗੁਰਵਾਨੀ ਉਹਨੂੰ ਇੱਕ ਨੂਰ ਮੰਨਦੇ ਇੱਕ ਨੂਰ ਹੈ ਸਭ ਕੋਈ ਤੂੰ ਇਦੀ ਕਿਸੇ ਦੀ ਕੋਈ ਪੁੱਤ ਨਹੀਂ ਹਾਂ ਸ਼ਰੀਰ ਖੜ ਕੇ ਉਹ ਰਿਸ਼ਤਾ ਹੈ ਡਮਾਗ ਅਸੀਂ ਉਹਨੂੰ ਧੀ ਪੁੱਤ ਬਦ ਲਿਆ ਉਹ ਮਨਵੱਤ ਨਹੀਂ ਹੋ ਰੂਏ ਬਨ ਲਿਆ ਹੋਇਆ ਜੋ ਧੀ ਤੇ ਸੱਚ ਮੰਨਿਆ ਤੇ ਗੁਰਮੁਖੀ ਕਹਿੰਦੀ ਹੈ ਜੀਵਨ ਜੰਗ ਸੱਚ ਕਰ ਜੰਗ ਮੈਂ ਤੈਨੂੰ ਸੱਚ ਮੰਨ ਲੈ ਜੋ ਧੀ ਦਾ ਅਖਰੂ ਤੇ ਸੱਚ ਹੈ ਇੱਥੇ ਆ ਕੇ ਗੁਰਬਾਣੀ ਦਾ ਰਾਹ ਵੱਖਰਾ ਹੋ ਜਾਂਦਾ ਗੁਰਮੁਖਾ ਦਾ ਅਰਦੂਆ ਜਿਹੜੀ ਗੁਰਮੁਖਾ ਦਾ ਰਾਹ ਵੱਖਰਾ ਵੱਖਰਾ ਹੋ ਜਾਂਦਾ ਪਾਸ਼ਾ ਵੀ ਵੱਖਰੀ ਹੋ ਜਾਂਦੀ ਹੈ ਦੇਖਿਆ ਕਿ ਉਹਾਂ ਨੇ ਜੋਤ ਦੀ ਗੱਲ ਕਰਦੀ ਏ ਉਹਾਂ ਨੇ ਜਾਨ ਦੀ ਗੱਲ ਕਰਦੀ ਏ ਸਰੀਰ ਦੀ ਗੱਲ ਕਰਦੀ ਏ ਜਿਹਦਾ ਸਰੀਰ ਤੋਂ ਬਾਹਰ ਅੱਤੇ ਸੁਣਿਆ ਹੀ ਨਹੀਂ ਕੁਛ ਦੇਖਿਆ ਹੀ ਨਹੀਂ ਉਹ ਕਿਵੇਂ ਸਮਝੇ ਉਹ ਹਸਤੀ タルਮੇਲ ਲਈ ਬੈਠੇ タルਮੇਲ ਖਾਤਰ ਬਹੁਤ سارے ਲਫ਼ਜ਼ ਕੱਢੇ ਬਹੁਤ ਕੁਝ ਲਿਖਿਆ ਹੋਇਆ ਗੁਰਬਾਣੀ ਚ ਵੀ ਦੀਆਂ ਅਵਲੀ ਵੀ ਦਿੱਤੀ ਹੋਈ ਏ ਕਿ ਬਜਾ ਥੋੜੀ ਬਾਣੀ ਕੀ ਸ਼ਰਤਾਂ ਨੇ ਬਹੁਤ ਸਾਰੀਆਂ ਸ਼ਰਤਾਂ ਨੇ ਨਾਨਕ ਦਾਸ ਮੁਖ ਤੇ ਨਾਨਕ ਕਹਿੰਦਾ ਦਾਸ ਮੁਖ ਤੇ ਜੋ ਬੋਲੇ ਨਾਨਕ ਦਾਸ ਨਹੀਂ ਲੱਗਦਾ ਏ ਨਾਹ ਕਹਿੰਦਾ ਨਾਨਕ ਦਾਸ ਮੁਖ ਤੇ ਜੋ ਬੋਲਣ ਜਿੰਨਾ ਵੀ ਤੇਰੇ ਦਾਸ ਦੇ ਐਸਾ ਬਥੇਰੇ ਜਿਹੜਾ ਉਹਨਾਂ ਨੇ ਮੂਹਰੇ ਬੋਲਦੇ ਨੇ ਯਹਾਂ ਉਹ ਸੱਚ ਹੋ ਗਏ ਦੋ ਸਚਾਈਏ ਉਹਦੇ ਸੁਧਾਰੀ ਭਾਸ਼ਾ ਜੀ ਵੀ ਸੱਚ ਹੈ ਜਿਹੜਾ ਕਾਰੀ ਦੁਨੀਆ ਵਿੱਚ ਵੀ ਸੱਚ ਹੈ ਦੋ ਪੂਰੀਆਂ ਕਰਦੀਆਂ ਚਾਹੀਦੀਆਂ ਨੇ ਅਰਥ ਨੇ ਸਾਧਨ ਵਾਲੀ ਜਿਹੜੀ ਤੁਸੀਂ ਸਟ्रेस ਕਰਦੇ ਜਿਹੜੀ ਚੀਜ਼ ਤੋਂ ਗੱਲ ਠੀਕ ਹੈ ਤੁਹਾਡੀ ਆਪਣੀ ਜਗ੍ਹਾ ਤੁਸੀਂ ਕੱਲੀ ਨੂਰ ਤੇ ਸਟੈਸ ਕਰਦੇ ਹੋ ਪਰ ਜਿਹੜਾ ਆਦਮੀ ਨਾਲ ਗੱਲ ਹੋ ਰਹੀ ਹੈ ਤੇ ਅਦਲ ਤੇ ਖੜਾ ਹੈ ਜੀ ਹੈਲ ਤੇ ਖੜੇ ਤੇ ਤੇ ਪਤ ਪੁੱਤ ਬਿਠਾ ਚੱਕ ਕੇ ਉੱਤੇ ਲੈ ਕੇ ਆਉਣ ਅਸਾਂ ਆ ਗੱਲ ਹੈ ਠੀਕ ਹੈ ਜੀ ਫਰੀਦਕੋਟ ਵਾਲਿਆਂ ਨੇ ਅਰਥ ਕੀਤੇ ਹੋਏ ਆ ਵੈਸੇ ਉਹ ਕਹਿੰਦੇ ਆ ਕੱਲੀ ਕਲੇਸ਼ ਕਲੇਸ਼ ਮੈਂ ਜਿਨ ਪੁਰਸ਼ੋਂ ਦਾ ਜਨਮ ਹੈ ਤਿੰਨ ਦਾ ਪੁੱਤ ਮਨ ਜਿਨ ਕਾ ਬੱਚਾ ਹੈ ਧੀ ਬੁੱਧੀ ਜਿਨਕੀ ਬੱਚੀ ਹੈ ਜੋਰੂ ਇਸਤਰੀ ਭਾਵ ਅਵਿਦਿਆ ਜਿਨ੍ਹਾਂ ਭਾਵ ਸਭ ਅਸਾਰੀ ਸੰਪਤੀ ਕਾ ਸਰਦਾਰ ਹੈ ਉਹਨਾਂ ਨੇ ਆਏ ਕਿ ਜਿਹੜੀ ਅਵਿਦਿਆ ਉਹਨੂੰ ਜੋਰੂ ਕਿਤੇ ਕਿਹਾ ਗੁਰਬਾਣੀ ਤਾ ਦੱਸ। ਆਪੀ ਫੇਰ ਪੁੱਛੋ ਮੈਂ ਗੁਰਬਾਣੀ ਦੱਸੋ ਕਿਤੇ। ਜੋਰੂ ਅਖਰ ਕਿਤੇ ਵਾਕਾਂਕ ਜੋਰੂ ਅਵਿਦਿਆ ਵਾਹ ਹੈ ਫਿਰ ਤੂੰ ਤੂੰ ਤੁਸੀਂ ਨਹੀਂ ਗਿਲਦਾ ਇਹ ਮਨਾਂ ਕੀ ਕਾ ਸਾਰਾ ਪੜਿਆ ਹੋਇਆ ਇੱਕ ਵਾਰੀ 10 ਵਾਰ ਪੜਿਆ ਹੈ। ਕਾਸਪਤਰਾ ਬਾਰੇ ਸਾਬਸ ਨਾਲ ਕੀ ਮਾਇਚ ਵੀ ਕੀਤੇ ਰੇ ਦੀ ਇਸੇ ਨੇ ਕੀਤੀ ਪਰ ਉਹਨੇ ਨਹੀਂ ਨ ਲਿਖਿਆ ਹੈ ਉਹਨੇ ਤਾਂ ਨਹੀਂ ਮਨ ਬੱਚਾ ਉਹ ਭਾਸ਼ਾ ਹੀ ਬਦਲੀ ਪੁੱਤ ਜਨੂਰ ਧੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ ਹਾਂਜੀ ਉਹ ਉਹ ਜੋੜਦਾ ਕਹੇ ਹੁਕਮ ਹੁੰਦੇ। ਇਸਤਰੀ ਜਿਹੜੀ ਹੈਗੀ ਆ ਔਰ ਸਿੱਧ ਬਾਇਆ ਨਾਲ ਜੋੜ ਦਈਏ ਤੋੜ ਦਈ ਨਹੀਂ। ਤੋੜਦਾ ਆਦਮੀ। ਕਿਉਂ ਇਹਨੂੰ ਹਾਲਾ ਆਦਮੀ ਦਾ ਕੰਮ। ਜੋੜਦੂ ਜਾਤ ਨਾਲ ਜੋੜਨਾ ਕੋਈ ਗ੍ਰੰਥ ਵੀ ਨਹੀਂ ਲਿਖਿਆ ਹੁਣ ਉਹ ਦੱਸੋ ਵੀ ਉਹ ਜੋੜ ਕਿਵੇਂ ਰਹੀਆਂ? ਯਾ ਤਾਂ ਗ੍ਰੰਥ ਹੋਵੇ ਉਹ ਦੱਸੇ ਵੀ ਆਹ ਲਿਖਿਆ ਹੋਇਆ। ਜਿਹੜੀ ਮਤ ਬਣਾਈ ਹੋਈ ਆ ਤੁਹਾਡੀ ਉਹੀ ਇਸਤਰੀਆਂ ਦੀ ਮਤ ਹੈ। ਇਸੇ ਵਾਸਤੇ ਬਣਾਈ ਸੀ ਮਤ ਉਹ। ਤਾਂ ਹੀ ਖੱਬਾ ਪੈਰ ਪਹਿਲਾਂ ਉੱਠਦਾ ਖੱਬੇ ਪਾਸੇ ਨੂੰ ਫੇਰੇ ਲਈ ਜਿਹੇ ਪਾਸੇ ਨੇ ਪਰ ਕਰਮ ਕਰਦੇ ਉਲਟੀ ਉਲਟੀ ਰਹੇ ਕੀ ਉਲਟੀ ਰਹੇ ਇਹ ਹੋ ਗਿਆ ਜੀ ਹਾਂ ਸਾਕਤਾਂ ਦੀ ਬੱਤਾ ਜੋਰੂ ਦੀ ਬੱਤਾ ਨੇ ਜਿੱਦਿਆਂ ਵੀ ਸਾਕਤਾਂ ਨਹੀਂ ਉਹ ਸਰੀਆ ਚਿੱਤਰ ਉਹਦੇ ਵਿੱਚ ਆਉਂਦਾ ਸਾਰੇ ਉੱਗਣੇ ਉੱਗਣੇ ਉੱਤੇ ਦਿਖਾਏ ਹੋਏ ਅੱਛਾ ਜੀ ਕੋਈ ਦਾ ਪਾਪ ਆ ਵੀ ਉਹ ਜਿਹੜੀ ਮੱਤ ਤੇ ਚਾਹੇ ਉਹ ਬੰਦੇ ਦੀ ਉਹ ਲਿਖੀ ਹੋਵੇ ਮੱਤ ਉਹ ਮੂਰਤੀ ਪੂਜਨੀ ਵੇਖੇ ਪਰ ਉਹਾਂ ਨੇ ਕਹਿੰਦੇ ਕੱਲ੍ਹ ਦਾ ਸੀ ਛੱਡੀ ਦਾ ਉਹਨਾਂ ਨੂੰ ਰਾਏ ਨਹੀਂ ਹੋਈ ਔਰਤਾਂ ਦਾ ਪੂਰਤੀ ਦੁਨੀਆਂ ਦੇ ਹੋਰ ਧਰਮ ਵੀ ਤਾਂ ਹੈ ਨਾ ਜਿਨ੍ਹਾਂ ਵਿੱਚ ਨਹੀਂ ਔਰਤ ਨੇ ਔਰਤ ਵਾਲਾ ਕਿਤੋਂ ਆ ਕੇ ਸ਼ੈਵ ਦੀ ਥੋੜੀ ਡਿਗਰੀ ਵੀ ਉਹਦੀ ਵਧਾਈ ਹੋਈ ਹੈ ਦੂਰ ਨਾਲ ਤਰਕੂ ਕਰਨ ਸਮਝ ਵੀ ਹੈ ਭੱਤੇ ਨਹੀਂ ਵੀ ਕਭੀ ਹੈ ਜਿੱਦੀ ਬਿਲਕੁਲ ਮੂਰਤੀ ਪੂਜਾ ਨਹੀਂ ਕਰਦੇ ਆ ਬੰਦੇ ਦੀ ਗੱਲ ਦੌਰ ਹਾਲੇ ਕਿ ਬੰਬੂ ਸਾਖ ਦੀ ਵੀ ਪੂਰਤੀ ਨਹੀਂ ਹੋ ਬਿਲਕੁਲ ਉਹ ਬੋਟਾ ਬਰੂ ਜ਼ਰੂਰ ਜਾਣਦੇ ਲੋਕ ਕਿ ਉਹ ਜੋ ਜਿਹੜੀ ਅਸੀਂ ਬਾੜ ਕਰਦੀ ਹੈ ਉਹ ਕੋਈ ਗੈਰਹੀ ਸ਼ਕਤੀ ਕਹਿੰਦੇ ਸੀ ਕਿਸ ਗੱਲ ਕਿਹਦੇ ਲਿਖੀ ਗ੍ਰੰਥਾਂ ਚ ਲਿਖੀ ਹੋਊਗੀ ਉਹੀ ਸਿਮਰਤੀ ਹੈ ਆਹ ਹੋਈਆਂ ਨੇ ਅਸੀਂ ਵੀ ਸਾਖੀਆਂ ਤੇ ਅੱਜ ਤੱਕ ਪ੍ਰਚਾਰ ਕੀਤਾ ਹੈ ਮਾਇਆ ਪ੍ਰਧਾਨ ਆਜ ਵੀ ਮਾਇਆ ਹੂੰ ਜੋਤ ਨੂੰ ਛੱਡ ਕੇ ਜਾਤ ਤੇ ਆਜੀ ਜਾਤ ਮਾਇਆ ਹੈ। ਸ਼ਰੀਰ ਮਾਇਆ ਮਾਇਆ ਦੀ ਪੂਜਾ ਭਾਵ ਆਪਾਂ ਮਾਇਆ ਲਵਾਂਗੇ ਕਰਦੀਆਂ ਉਹ ਜੋਰੂ ਕਰਦੀਆਂ ਕਰਦੀ ਉਹ ਮਰਦਾਨੀ ਮਤ ਹੈ ਜੀ। ਬਿਲਕੁਲ ਸਾਡੀ। ਨੇ ਕਿਹਾ। ਮਰਦ ਆਲੀ ਗੱਲ ਹੈ। ਠੀਕ ਹੈ ਜੀ। ਹਾਂ ਜੀ। ਪਹਿ ਹਿੰਦੂ ਮੁੱਲੇ ਭੁੱਲੇ ਅਖੁੱਟੀ ਜਾਹੀਂ। ਕੀ ਨਾ ਜਿਹੜੇ ਦੂਧੇ ਉਹ ਬਿਲਕੁਲ ਕਹਿੰਦਾ ਉਹ ਤਾਂ ਪਹਿਲੀ ਪੌੜੀ ਤੋਂ ਪਹਿਲੇ ਸਟੈਪ ਤੋਂ ਹੀ ਭੁੱਲ ਗਏ ਉੱਥੇ ਦਾ ਪਹਿਲੇ ਨਵਾਂ ਵਿਖਾਉਂਦਾ ਉਹ ਸੋਲ ਮਾਰ ਪਹਿਲੇ ਸਟੈਪ ਤੋਂ ਹੀ ਭੁੱਲੇ ਤਾਂ ਗੱਲਾਂ ਨਹੀਂ ਇਹ ਨਹੀਂ ਉਹ ਬਿਲਕੁਲ ਅਸਲ ਭੁੱਲ ਹੈ ਜਿਹੜਾ ਉਹ ਤਾਂ ਬਿਲਕੁਲ ਉਹਨਾਂ ਪਤਾ ਹੀ ਨਹੀਂ ਉਹ ਤੇ ਦੀ ਗੱਲ ਉਹਨਾਂ ਨੇ ਛੱਡ ਦਿੱਤੀ ਆਤਮਾ ਹਰ ਪਰਮਾਤਮਾ ਨਾਲ ਹਰ ਬਸਤਿ ਦਾ ਨਾਲ ਵਾਲੀ ਇਕੱਲੀ ਸ਼ਰਤ ਹੈ ਬਿਲਕੁਲ ਠੀਕ ਹੈ ਹਿੰਦੂ ਮੁੱਲੇ ਪੁੱਲੇ ਅਖੁੱਟੀ ਜਾਂਹੀਂ ਉਹ ਖੁੱਟੀ ਕਮਾਈ ਕਰਦੇ ਸੀ ਖੁੱਟ ਜੀ ਜੋ ਪ੍ਰਾਪਤੀ ਖੁਸ਼ੀ ਉਹ ਖੁੱਟਾ ਜਿਹੜਾ ਨਾਮ ਨੇ ਖੁੱਟਾ ਜਿਸ ਖੋਟ ਨਹੀਂ ਹੈ ਉਹ ਨਿਖੁੱਟ ਠੀਕ ਹੈ ਜੀ ਹਾਂ ਦਰਦ ਕਹਿਆ ਜੋ ਕਰ ਹੋਇਆ ਕਰਦੇ ਹਾਂ ਉਹਨਾਂ ਨੇ ਕਿ ਨਾਰਦ ਹੋਰ ਬਣਾਇਆ ਹੋਇਆ ਪੁਰਾਣ ਉਹਨਾਂ ਨਾਲ ਨਾਲ ਜਿਹੜਾ ਖੁੱਟੇ ਜੀ ਅੱਛਾ ਜੀ ਅਗਰਿਤ ਭਰਤੀ ਦਾ ਹਾਰਦੀ ਆ ਹੈ ਜਿਹੜੀ ਗੁਰਮਤ ਹੈ ਤੇ ਨਾ ਰਜੀ ਦਾਰਦੇ ਦੇ ਕਾ ਲਿਖਿਆ ਹੋਇਆ ਕਰਦੇ ਜਿੱਦੇ ਉਹਨਾਂ ਦਾ ਗ੍ਰੰਥ ਦੱਸੋ ਕਿਹੜਾ ਹਾਰਦੀ ਹੈ ਨਾਰਦ ਨੇ ਜੋ ਕੁਝ ਲਿਖਿਆ ਸੀ ਉਹ ਪਿਆ ਸੀਗਾ ਉਹ ਕਾਸ਼ੀ ਸੀ ਦੀ ਸੀਗਾ ਉਹ ਪਿਆ ਸੀ ਕੋ ਕਬੀਰ ਜੀ ਹੈ ਮਾਹਰ ਕਹਿੰਦੇ ਨੇ ਆਪ ਬੰਦੇ ਦੇ ਵੀ ਹਾਰਦ ਨੇ ਇੱਥੇ ਮਾਹਰ ਭਗਤੀ ਕੀਤੀ ਹੈ ਸ਼ਿਵ ਕੀ ਬਸਾ ਬੁੱਧ ਸਰਬਸ शिवतीपुरी ਦਾ ਸਰਬੋਤਮ ਹੁੰ ਗਿਆ ਇਹ ਸਰਬੋਤਮ ਤੁਹਾਡੇ ਕੋਲ ਹੈ ਨਹੀਂ ਉਹ ਉੱਥੇ ਉਹ ਉੱਥੋਂ ਬੁੜੀਆ ਜਾਂਦੇ ਨਾਲ ਦੀ ਭਗਤੀ ਨਾਰਦ ਦਾ ਤਾਂ ਇੱਕ ਪਾਸੇ ਤੁਸੀਂ ਵਿਰੋਧ ਕਰੀ ਜਾਂਦੇ ਹੋ ਵੀ ਉਹ ਕਹਿੰਦਾ ਇੱਥੇ ਨਾਰਦ ਨੂੰ ਪੁੱਛਿਆ ਵੀ ਜੀ ਤੁਸੀਂ ਭਗਤੀ ਕਰਦੇ ਹੋ ਇੱਥੇ ਜਿਹੜਾ ਇੱਥੇ ਕੋਈ ਆਊਗਾ ਉਹਨੂੰ ਕੀ ਥੋੜੇ ਮਿਲੂਗਾ ਇਹਨਾਂ ਨੇ ਸਾਖੀ ਬਣਾਏ ਉਹ ਨਾਰਦ ਬੋਲਿਆ ਨਹੀਂ ਚੁੱਪ ਕਰ ਗਿਆ ਫਿਰ ਪੁੱਛਿਆ ਫਿਰ ਪੁੱਛ ਜਦੋਂ ਉਹਨੇ ਕਿਹਾ ਵੀ ਅੱਕ ਗਿਆ ਉਹ ਗੁੱਸੇ ਕਰ ਗਿਆ ਨਾਰਦ ਨੂੰ ਐਨਾ ਉਹ ਖੋਤੇ ਦੀ ਜ਼ਰੂਰਤ ਹੋਊਗਾ ਫਕੀਰ ਹੁਣੇ ਸ਼ੁਰੂ ਤੋਂ ਜਿਹੜਾ ਨਾਰਦ ਦਾ ਬਰੋਧ ਕਰਦੇ ਆਂ ਇਹ ਨਾਰਦ ਦੀ ਭਗਤੀ ਹੈ ਭਗਤਾਂ ਆਏ ਵੀ ਜਿਵੇਂ ਜੀ ਨਾਰਦ ਕੋਈ ਆਦਮੀ ਨਾ ਹੋਣੀ ਜਿਹੜੀ ਦਰਗਾਹ ਉਹ ਭਗਤੀ ਦੀ ਗੱਲ ਜਿਹੜ ਕੋਈ ਰੱਦ ਨਹੀਂ ਕਰ ਸਕਦਾ ਉਹ ਤਾਂ ਸਾਰੀਆਂ ਗੱਲਾਂ ਗੁਰਬਾਣੀ ਦੇ ਸੱਚ ਹਨ ਪਲਸ ਸਾਰੀਆਂ ਗੱਲਾਂ ਉਸ ਗੁਰਬਾਣੀ ਨੂੰ ਕਿਸੇ ਵੀ ਆਇਆ ਇਹੋ ਜਿਹਾ ਦਿਲ ਲਖਾਇਆ ਨਹੀਂ ਗੁਰਬਾਣੀ ਨੂੰ ਸੱਚ ਮੰਨ ਲੈਣਾ ਉਸ ਵੇੜ ਇਸ ਗੱਲ ਦਾ ਪੁਲੇਖਾ ਹੈ ਕਿ ਉਹ ਨਾਰਦ ਦਾ ਕਿਹਾ ਕੁਮਾਰੇ ਹਨ ਪਰ ਇਹ ਭੁੱਲੇ ਉਹਨਾਂ ਦੀ ਨਾਰਦ ਨੇ ਬਿਲਕੁਲ ਨਾਰਦ ਨਾਰਦ ਕਹਿਆ ਸੇ ਪੂਜ ਕਰਾਂਹੀਂ ਅੰਦੇ ਲੈ ਪੂਜੇ ਮੁਗਧ ਗਵਾਰ। ਆ ਜੇ ਹਾਂ ਕਰ ਸਕਦਾ। ਬੋਲ ਨਹੀਂ ਸਕਦਾ। ਮੀਕੀ ਸਾਡੀ ਸਰਦੋ ਗੱਲ ਤੇ ਸੰਵਾਲੀ ਗੱਲੀ ਜੀ ਬਸ ਜਿਹੜਾ ਪਾਇਆ ਤੇ ਨਹੀਂ ਛਪਾਇਆ ਜਿਹੜਾ ਪਾਲ ਲੈ ਲਿਆ ਉਹ ਤਾਂ ਛਪਾਲ ਲੈ ਲਿਆ ਦੱਸਣ ਨੂੰ ਕੁਝ ਹੁੰਦਾ ਤਾਂ ਦੱਸ ਦੇ ਐਡਾ ਦੱਸਣ ਵਾਲੀ ਗੱਲ ਨਹੀਂ ਦੱਸਦੀ ਜਿਹੜਾ ਜਿਹੜਾ ਪਾਲ ਲੈਂਦਾ ਉਹ ਤਾਂ ਬੋਲਦਾ ਹੀ ਨਹੀਂ ਬੋਲਣ ਦੀ ਲੋੜ ਕਿਉਂ ਪਈ ਵੀ ਗਿਆਨ ਹੈ ਨਹੀਂ ਬੋਲਣ ਲੱਗੇ ਵੀ ਉਹਨਾਂ ਨੂੰ ਫਿਰ ਉਹ ਕਹਿੰਦੇ ਆ ਦੱਸਣ ਦੀ ਲੋੜ ਨਹੀਂ ਹੈ ਇਹ ਮੁੱਲੋਂ ਭੁੱਲਿਆਂ ਦੀ ਨਹੀਂ ਦੱਸਾਂ ਗੱਲੇ ਦੀ ਮੇਗੀ ਮੁਖਨੀ ਤਸਾੜੀ ਗੱਲੇ ਨਹੀਂ ਜਿਨ ਪਾਇਆ ਤੈਨੂੰ ਛਪਾਇਆ ਠੀਕ ਹੈ ਅੰਧ ਅੰਧਾਰ ਅੰਧਰ ਹੈ ਵੀਰ ਅੰਧਕਾਰ ਹੈ ਅੰਦਰ ਵੀਰੇ ਜੀ ਪੱਥਰ ਲੈ ਪੂਜੇ ਨਹੀਂ ਕੋਈ ਰੋਸ਼ਨੀ ਕੋਈ ਨਹੀਂ ਠੀਕ ਨਿਸ਼ਾਨੀਆਂ ਆਏ ਹਨ ਹਿੰਦੂ ਦੀ ਗੱਲ ਹੈ ਵਿੱਚ ਮੁਸਲਮਾਨ ਦੀ ਆ ਸਕਦੇ ਅੱਛਾ ਜੀ ਠੀਕ ਹੈ ਜੀ ਓਏ ਜੇ ਆਪ ਡੁੱਬੇ ਤੁਮ ਤਾਰਨ ਹਾਰ ਆਪ ਡੁੱਬੇ ਹੋਏ ਨੇ ਤੁਹਾਨੂੰ ਕੀ ਦੱਸਾਂਗੇ ਤੁਹਾਨੂੰ ਆਲੀ ਮਗਰ ਲੱਗਦੇ ਜਿਹੜਾ ਆਪ ਡੁੱਬਿਆ ਹੋਇਆ ਹੈ ਉਹ ਦੂਏ ਚ ਕਿਵੇਂ ਜੀ ਅੰਦੇ ਆ ਗੁੰਗੇ ਆ ਬਿਲਕੁਲ ਬਿਲਕੁਲ ਹਾਂਜੀ ਉਲਟੂ ਜੋਤ ਸਰੂਪ ਇਹ ਗੱਲ ਤਾਂ ਕਹੀ ਸੀ ਉਹ ਦੀ ਗੱਲ ਹੀ ਕਰਦੇ ਚਲੋ ਠੀਕ ਹੈ ਜੀ ਸੌੜੀ ਤੇਰੇ ਵਸ ਹੈ ਤੂੰ ਸੱਚਾ ਸਾ ਭਗਤ ਰੱਤੇ ਰੰਗ ਏਕ ਹੈ ਪੂਰਾ ਵੇਸਾ ਹੁਣ ਪਰਮੇਸ਼ਰ ਨੂੰ ਗਿਆ ਵੀ ਸਭ ਤੇਰੇ ਬਸ ਹੈ ਸਭ ਕੁਝ ਤੇਰੇ ਬਸ ਸਭ ਤੇਰੇ ਫੋਟੇ ਚੱਲੇ ਰੰਗ ਏਕਕ ਹੈ ਪੂਰਾ ਰੰਗ ਦੇ ਹੁਕਮ ਦਾ ਹੁਕਮ ਆਉਂਦਾ ਹੈ ਕੋਈ ਨਾ ਹੁਕਮ ਹੈ ਗੁਰ ਸਤਗੁਰ ਤੂੰ ਸੱਚਾ ਸਾ ਸੱਚ ਤੇਰੇ ਕੋਲ ਹੋ ਬਿਲਦੇ ਜਿੰਨੂ ਵੀ ਸੱਚ ਮਿਲਿਆ ਤੇ ਤੇ ਤੈ ਵੀ ਮਿਲਿਆ ਹਾਂਜੀ ਇਹ ਕਿਸੇ ਦਾ ਕੋਈ ਚੀਜ਼ ਲੈਣਾ ਹੋਵੇ ਖਰੀਦਣਾ ਹੋਵੇ ਸੱਚ ਖਰੀਦੇ ਪਹਿਲਾਂ ਵਸਤ ਸਿਹਾਰ ਦੇ ਚਾਹੀਦਾ ਲੋਭ ਹੈ ਵੀ ਆਦੀ ਤੂੰ ਬੋਲ ਉਹਨਾਂ ਨੂੰ ਪੂਰਾ ਭਰੋਸਾ ਪੂਰਾ ਵਾਕਈ ਹੁਕਮ ਦੇ ਬਸ ਵਿੱਚ ਹੈ ਸਭ ਕੁਝ ਇਹ ਗੱਲ ਸੱਚ ਹੈ ਅੱਛਾ ਮੇਰੇ ਭਰਮੋ ਵੀ ਚਬਜੀ ਤਦ ਕਹੇਦੇ ਉਹ ਗਲਤ ਹੈ ਮਨ ਅਲਕੋਈ ਵੀ ਪੂਰਾ ਨਹੀਂ ਅੰਮ੍ਰਿਤ ਭੋਜਨ ਨਾਮ ਹਰ ਰਜ ਰਜ ਜਨ ਖਾਓ ਸਭ ਪਦਾਰਥ ਪਾਈਨ ਸਿਮਰਨ ਸੱਚ ਲਾਓ ਸਰੀਰ ਦੀ ਖੁਰਾਕ ਨੀ ਹੈ ਜਾਨ ਦੀ ਖੁਰਾਕ ਆਤਮਾ ਦੀ ਖੁਰਾਕ ਹੈ ਜਾਨ ਵਾਸਤੇ ਆ ਉਹ ਅੰਮ੍ਰਿਤ ਭੋਜਨ ਦਾ ਉਹ ਜਿਹੜਾ ਉਹ ਖੁਰਾਕ ਹੈ ਜਾਨ ਦੀ ਅਸਲ ਚ ਉਹ ਜਾਨ ਦੀ ਸਰੀਰ ਦੀ ਖੁਰਾਕ ਹੈ ਅਜੇ ਦੀ ਹੈ ਹਾਂਜੀ ਦੇਹੀ ਗੁਪਤ ਜਿਹੜੂ ਅਸੀਂ ਤੇਹੀ ਬਿਠੇ ਹਾਂ ਗੁਰਬਾਣੀ ਇਹ ਦੇਹੀ ਤਾਂ ਗੁਪਤ ਹੈ गुप्त शरीर ਦਾ ਜਵਾਬਦਾਰ ਉਹ ਨਹੀਂ ਹੈ। ਜੀ ਜੋ ਦੀਈ ਹੈ ਉਹ ਸਹੀ ਹੈ। ਬੰਤ ਗੁਪਤ ਵਿਦੇਹੀ ਹੈ। ਫਗਲਾ ਜੋੜ ਜਗਦੀਸ਼ ਨੇ ਆਪ ਲਾਇਆ ਹੋਇਆ। ਆਤਮਾ ਨਾਲ ਸ਼ਰੀਰ ਦਾ ਜਿਹੜਾ ਬਗਾਇਆ ਜੋੜਿਆ ਇਹ ਤਾਂ ਉਹਦੀ ਕਰਾਮਾਤ ਹੈ ਉਹਦੇ ਹੁਕਮ ਦੇ ਜੁੜਿਆ ਹੋਰ ਨਹੀਂ ਕੋਈ ਜੋੜ ਸਕਦਾ। ਠੀਕ ਹੈ ਜੀ। ਉਹ ਰਾਂਜ ਰਾਂਜ ਕੇ ਖਾਦੇ ਤੇ। ਲੋਬੂ। ਜਵਾਬ ਉਹਨਾਂ ਦੀ ਖਰਾਬ। ਸਭ ਪਦਾਰਥ ਪਾਈਨ ਸਿਮਰਨ ਸੱਚ ਲਾਓ ਸਾਰੇ ਪਦਾਰਥ ਸੁਲਝਣ ਮਨ ਜਾਂਦਾ ਸਾਰੀ ਇੱਛਾਵਾਂ ਪੂਰੀਆਂ ਨੇ ਉਹ ਜੀ ਜੀ ਲਗਾਈਦਾ ਹਰ ਕਦੇ ਤੋੜ ਤਾਉਂਦਾ ਘਾਟਾ ਪੈਂਦਾ ਐਸਾ ਬਣਜ ਕਰਦੇ ਨੇ ਹੋ ਸਕੇ ਦਾ ਵਿੱਚ ਘਾਟੇ ਦਾ ਸਵਾਲੇ ਨਹੀਂ ਪੈਦਾ ਸੱਚ ਚ ਲਾਹ ਹੀ ਲਾਹ ਤੋੜ ਤਾਉਂਦਾ ਹੀ ਪਿਆਰੇ ਪਾਰਬ੍ਰह्म ਨਾਨਕ ਹਰ ਅਗੰਮ ਅਗਾਹ ਹਰਤ ਪਿਆਰੇ ਪਾਰਬ੍ਰह्म ਪਾਰਬ੍ਰह्म ਦੇ ਪਿਆਰੇ ਹੁੰਦੇ ਨੇ ਸਤ ਪਾਰਬ੍ਰह्म ਬਹੁਤ ਪਿਆਰੇ ਨੇ ਸਤ ਬਾਹਰ ਹਰ ਅਗੰਮ ਉਹ ਪਾਰਬ੍ਰह्म ਦਾ ਉਹਦੇ ਬਾਰੇ ਤਾਂ ਨਹੀਂ ਕੁਝ ਕਹਿ ਸਕਦੇ ਅਸਲੀਅਤ ਕੀ ਹੈ ਕਿੱਦਾਂ ਹੈ ਪਰ ਸੰਤਾਂ ਬਾਰੇ ਦੱਸ ਸਕਦੇ ਆ ਵੀ ਪਾਰਬ੍ਰह्म ਨੂੰ ਸੰਤ ਪਿਆਰੇ ਹੁੰਦੇ ਠੀਕ ਹੈ ਜੀ ਸਾਧਾ ਬਾਰੇ ਦੱਸੋ ਜੀ ਕਿਹਦਾ ਨਾ ਪਿਆਰ ਕਰ ਉਹਦੇ ਸੁਭਾਅ ਦਾ ਇੰਨਾ ਗੇਸਾ ਸਾਨੂੰ ਪਤਾ ਠੋੜਾ ਜਿਹਾ ਮਾਨਕ ਹਰ ਅਗਮ ਅਗਾ ਇਹ ਨਿਦਸਥ ਹੈ ਉਹ ਦਾ ਰੂਪ ਹੈ ਬਲੁਖੀ ਬੁੱਧੀ ਤੋਂ ਪਰੇ ਦੀ ਗੱਲ ਹੈ ਉਹ ਠੀਕ ਹੈ ਸਹੀ ਇੱਥੇ 20ਵੀਂ ਪੌੜੀ ਸਮਾਪਤੀ ਹੈ ਜੀ